ਜਨਪ੍ਰਭ ਜਾਤਾ ਸੋ ਸੋਭਾ ਬੰਤ ਸਗਲ ਸੰਸਾਰ ਉਦਰੇ ਤੈ ਮੰਨਤ ਜਨਪ੍ਰਭ ਜਤਾ ਜੇਨਪ੍ਰਭ ਜਾਣ ਲਿਆ ਆਪਣਾ ਮੋਰ ਜਾਣ ਲਿਆ ਸੋ ਸੋਭਾ ਬੰਤ ਉਹ ਸੋਭਾ ਬੰਤ ਹੈ ਸੋਭਾ ਜੇ ਲੈ ਆਇਆ ਸਗਲੇ ਸੰਸਾਰ ਉਦਰੇ ਤੈ ਜ ਉਹਦਾ ਜਿਹੜਾ ਬੁੱਤਰ ਹੈ ਉਹਦੇ ਨਾਲ ਸਾਰਾ ਸੰਸਾਰ ਉਧਾਰ ਹੋ ਸਕਦਾ यानी जितने जितनी वो दी अवस्था है वही अवस्था तो प्राप्त हो जाती संसार अपने मानू काबू कर तो ऐसे तक कुर्बान है जिक्र कहां का था अलग है ना खुदा आराधना उधर ही कहो उधर ही कहो सुबह को खुदा करो पानी तो बाहर आ गया समझो ठिकाना क्या मान कुछ है ਅੱਗੇ ਕੁਝ ਅੱਗੇ ਦੀ ਗੱਲ ਦਖਣ ਲੱਗ ਜਨ ਵਾਲੀ ਦੁਨੀਆ ਦੇਖਣ ਲੱਗ ਪ੍ਰਭ ਦੇ ਸੇਵਕ ਸਗਲ ਉਧਾਰਨ ਪ੍ਰਭ ਦੇ ਸੇਵਕ ਦੁੱਖ ਵਸਾਰਨ ਜੇ ਪਾਣੀ 'ਚ ਡੁੱਬਿਆ ਹੋਵੇ ਆਦਮੀ ਤਾਂ ਉੱਥੇ ਤੱਕ ਜੀਹਾਂ ਨਹੀਂ ਇਹ ਤਾਂ ਸਾਧਕ ਡੁੱਬੇ ਤਾਂ ਨਹੀਂ ਆਸ ਜੈਸਾ ਇਹ ਜਹਾਜ ਉੱਤੇ ਹੋ ਉਪਰੇ ਵੀ ਦੰਦ ਉਹਦਾ ਆਣ ਇਹ ਆਵਾਜ਼ ਉਪਰ ਆ ਕੋਈ ਫੀਨਸ ਇਹ ਤਾਂ ਹਵਾ ਸਾਹ ਗਿਆਨੇ ਤੇ ਪਾਣੀ ਦੇ ਵਿੱਚ ਹਵਾ ਨਹੀਂ ਹਵਾ ਦਾ ਗਿਆਨ ਕਿਤੇ ਆਇਆ ਹਵਾ ਕੌਣ ਹੈ ਬਾ ਆਪਣਾ ਮੂਲ ਰਾਮ ਭਾਈ ਨੂੰ ਮੇਰਾ ਸਹੌਨਾ ਹਵਾ ਦਾ ਕਨੈਕਸ਼ਨ ਹੋ ਗਿਆ ਨਾ ਪਾਣੀ de bahar hai pani de bahar honge sare aakash na bhi honge bas oh to kahan da safar kare puran da gyan ho gaya zameen da gyan la ke nau judeya hoya hai etho rehnda aakash na bahar hoye je terehndi e bagh ne is sare pani jaega ohdo to pata hi ਪਾਣੀ ਦੇ ਕੋਲ ਪਾਣੀ ਦੇ ਬਾਹਰ ਹੈ ਨਾ ਪਾਣੀ ਦੇ ਬਾਹਰ ਹਵਾ ਹੈਗੀ ਹੈ ਅਕਾਸ਼ੀ ਹੈ ਅਗੇ ਆਤਾ ਏ ਡੁੱਬੇ ਨਾ ਬਣੇ ਥੱਲੇ ਡੁੱਬੇ ਨਾ ਹੋ ਕੋਈ ਨਹੀਂ ਵੀ ਜਲਦੀ ਆਰਡਰ ਕੀਆ ਹੈ ਉਹ ਹਾਂਜੀ ਆਪੇ ਮੇਰੇ ਲੈ ਕਿਰਪਾਲ ਗੁਰਕਾ ਸ਼ਬਦ ਜਪ ਭਏ ਨਿਹਾਲ ਆਪੇ ਮੈਲ ਇੱਕ ਵਾਰ ਫਿਰ ਇਸ ਅਸਥਾਨ ਦੇ ਵਿੱਚਾ ਕਰਪਾਲ ਨੇ ਆਪੇ ਮੰਗਾ ਲੈਣਾ ਹੁੰਦਾ ਉਹ ਗੁਰਕਾ ਸ਼ਬਦ ਜਪ ਭਏ ਨਿਹਾਲ ਗੁਰਕਾ ਸ਼ਬਦ ਜਪ ਕੋ ਭਏ ਦੇਖੋ ਜਪ ਪੂਰਾ ਹੋਇਆ ਜੇ ਆ ਗੁਰਬਾਣੀ ਜਪੀ ਜਪੀ ਜਾ ਆਰਾਧਨਾ ਨਹੀਂ ਕਿਸੇ ਜ਼ਬਰ ਦੀ ਨਹੀਂ ਗੁਰਕਾ ਸ਼ਬਦ ਜਪਾ پئے نهال نهال ہو گیا دو بڑا سبڑے پانی سمجھ لی جم جبڑے پانی ان کی সেবা سوئی लागे جن جیس نو کرپا کرے بر بھاگے ان کی সেবা سوئی लागे او جدی সেবা دسدا نہیں پھر ہو اجا یوں ਵਾਹ ਜਿਸ ने ਕਿਰਪਾ ਨੇ ਮਿਲਾ ਲਿਆ ਉਹਦੀ ਸੇਵਾ ਜਿਹੜੇ ਲੱਗ ਜਾਂਦੇ ਨੇ ਕੀ ਸੇਵਾ ਸੋਈ ਲੱਗੇ ਉਹੀ ਲੱਗਦਾ ਜਿਸ ਨੂੰ ਕਿਰਪਾ ਕਰੇ ਬੜ ਭਾਗੇ ਜਿਸ ਨੂੰ ਕਿਰਪਾ ਕਰੇ ਬੜ ਭਾਗੇ ਨਾਉ ਜਬ ਤ ਪਾਵੇ ਵਿਸ਼ਰਾਮ ਨਾਨਕ ਤਿਰਪੁਰਖ ਕੋ ਇਹ ਇੱਥੇ ਬੜਪਾਕੇ ਦਾ ਸੰਤਰਾ ਸੁਣ ਕਰਦਾ ਮਨ ਕੋ ਕੋ ਥੋੜਾ ਜਿਹਾ ਗਿਆਨ ਕਰਦਾ ਇੱਥੇ ਆ ਕੇ ਬੜਪਾਕੇ ਲਫ਼ਜ਼ ਕਰਦਾ ਤਰ੍ਹਾਂ ਰੰਗਾਸ ਤੇ ਸਭਾ ਉਹਦਾ ਉਹ ਸਾਗਰ ਰਹੀ ਬੜਾ ਬਸ ਥੋੜਾ ਜਿਹਾ ਗਿਆਨ ਕਰਦਾ ਦੋ ਪਹਾੜ ਤਾਂ ਲੈ ਵੀ ਦੋ ਪਹਾੜ ਹੁਣ ਪਿੱਛੇ ਕੀ ਗਿਆ ਮਨਵੀ ਜੱਤੇ ਆ ਗਿਆ ਰਹਿ ਗਿਆ ਵਿੱਚ ਸੇਤਾ ਦਾ ਆਟਾ ਫਟਰਾ ਨਹੀਂ ਰਹਿ ਗਿਆ ਉਹ ਸਰਪ੍ਰਸਾਦ ਪਰਮਕਾਨਾ ਸਰ ਰਹਿ ਗਿਆ ਹਾਂਜੀ ਨਾਮ ਜਪਤ ਪਾਵੇ ਨਾਨਕ ਤਿੰਨ ਪੁਰਖ ਕੋ ਉਤਮ ਕਰਮ ਆਪ ਜਪਤ ਪਾਵੇ ਬਿਸਰਾਮ ਤੇ ਸਾਥ ਦਾ ਨਾਮ ਜਪਦੇ ਨਾਮ ਸ਼ਬਦ ਜਪਦੇ ਨਾਲ ਕੁਝ ਨਾਮ ਜਪ ਆ ਗਿਆ ਇਦੋਂ ਸ਼ਬਦ ਜਪਣਾ ਇਨਾਮ ਜਪਣਾ ਨਹੀਂ ਨਹੀਂ ਜਿਹੜਾ ਉਪਦੇਸ਼ ਜਪੇ ਬੰਨ ਗੁਰਵਾਨੀ ਜਪੀ ਹੈ ਸਭ ਕੀ ਹੈ ਜਪਣਾ ਸਭ ਨਾਮ ਜਪਦਾ ਨਾਮ ਯਾਦ ਕੀ ਹੈ ਸ਼ਬਦ ਜਪਨ ਤੋਂ ਬਾਅਦ ਸਵਤੋ ਬਾਦ ਨਾਮ ਕੀ ਹੈ ਨਾਮ ਐਸੇ ਦੇ ਵਿੱਚ ਹੀ ਆ ਜਾਂਦਾ ਉਹ ਇਹ ਜਿਹੜੇ ਗਿਆਨ ਨਾਲ ਬੜਾ ਬੜਾ ਜਪਿਆ ਗਿਆਨ ਤੋਂ ਬਾਅਦ ਜਿਹੜਾ ਜਪਣਾ ਇਹ ਕੋ ਨਾ ਹੁਕਮ ਇਹ ਨਾ ਹੁਕਮ ਆ ਉਹ ਆਦਮ ਜਨਾ ਜਨਾ ਹੁਕਮ ਆ ਕੋ ਬੁੱਝਦੇ ਆ ਸਰੋ ਇਹਦੇ ਵਿੱਚ ਜੋ ਜੋ ਜੀਨ ਇਹਦੇ ਵਿੱਚੋਂ ਇਹ ਵੀ ਜਪਣਾ ਹੈ ਪਰ ਉਹ ਬੁੱਝਣਾ ਇਹ ਵੀ ਜਪਣਾ ਹੈ ਨਾਮ ਜਪਤ ਪਾਵੇ ਬਿਸ਼ਰਾਮ ਤੇ ਹੁਕਮ ਬੁੱਝ ਪਰਮਤਾਈ ਗਿਆ ਨਾਮ ਇੱਕ ਉਹ ਉਤਮ ਉਹ ਤਾਂ ਉੱਚੀ ਵਸਤੂ ਹੈ ਜਿਹੜਾ ਨਾਮ ਜੱਪ ਕੇ ਇਸਰਾਮ ਮਿਲ ਜਵੇ ਇਨਤਖਾਬਿਲ ਜਿਵੇਂ ਬਸ ਕੋਲ ਮਨ ਅਡੋਲ ਹੋ ਜਵੇ ਉਹ ਤੋਂ ਪਰ੍ਹੇ ਇੱਥੇ ਉੱਤਮ ਨਾਮ ਜਾਇ ਉਹ ਨੂੰ ਮਿਲੇ ਆਹ ਕਿਉਂਕਿ ਪੁਰਖ ਤਾਂ ਫਿਰ ਨਾਮ ਤੇ ਬਾਤ ਦਾ ਵਿਵਾਰ ਵੰਗ ਹੋ ਗਿਆ ਪੁਰਖ ਉਹਨੂੰ ਪਰਮੇਸ਼ਰ ਹੋ ਜਾਂਦਾ ਪੁਰਖ ਉਹ ਨਾ ਚਾਹਿਆ ਨਾ ਚਾਹਿਆ ਦੋ बदास चार बदास वाला ऊपर चले गए ओबे फूल फूल उत्तम हो गया फूल पर हो गया ना ओण पर <स्था>